पुञ्जांगप्रिया छंद जब द्वयसो ने गुरु दत्त देवं सदा एक चित्तं करै नित्य सेवं जटाजूट शीशं सो गंगातरंगं कवै छै सक्यांग को न अनंगं महाउज्जलि अंग बेभूत सोहै लखै मोहनमानी महामान मोहै जटाजूट गंगातरंगं महानं महाबुद्ध उदार विद्यानिधानं ਪਗੋ ਹੈ ਲਸੈ ਬਸਤਰ ਲੰਗੋਟ ਬੰਦਨ ਤਜੇ ਸਰਬ ਆਸਾ ਰਟੈ ਏਕ ਛੰਦੰ ਮਹਾ ਮੋਹਨ ਮਾਨੀ ਮਹਾ ਮੋਹਨ ਬਾਂਧੇ ਮਹਾ ਜੋਗ ਕਰਮੋਂ ਸਬੇ ਨਿਆਸ ਸਾਧੇਮ ਦਇਆ ਸਿੰਧ ਸਰਬੰਗ ਕਰਮ ਕਰਤਾ ਹਰੇ ਸਰਬ ਗਰਭੰ ਮਹਾ ਤੇਜ ਧਰਤਾ ਮਹਾ ਕੀ ਸਾਧਨਾ ਸਰਬ ਸਾਦੀ ਮਹਾ ਮੋਹਨ ਮਾਨੀ ਮਹਾ ਸਿੱਧ ਲਾਧੀ ਉਠੈ ਪ੍ਰਾਤ ਸੰਧਿਆ ਕਰੈ ਨਾਨ ਜਾਵੈ ਕਰੈ ਸਾਧਨਾ ਜੋਗ ਕੀ ਜੋਗ ਭਾਵੈ ਦਰਸੀ ਮਹਾ ਪਰਮ ਤਤੰ ਸੋ ਸੰਨਿਆਸ ਦੇਵੰ ਮਹਾ ਸੁਧ ਮਤੰ ਪਿਆਸਾ ਸੁਦਾ ਕਹਿ ਜੋ ਸਤਾਵੈਰ ਹੈ ਏਕ ਚਿਤੰ ਨਾ ਚਿਤੰ ਚਲਾਵੈ ਕਰੈ ਜੋਗ ਨਿਆਸੰ ਮੇਰਾ ਸੰਮੂਦਾਸੀ ਧਰੇ ਮੇਖਲਾ ਪਰਮ ਤਤੰ ਪ੍ਰਕਾਸੀ ਮਹਾ ਮਹਾ ਤਤ ਬਿਤਾ ਫਿਰੰ ਕਰੈ ਸਤ ਕਰਮੰ ਕੋ ਕਰਮ ਰਹਿ ਏਕ ਜਿਤੰ ਮੁਨੀ ਸੰਗੁ ਉਦਾਸੰ ਸ਼ਾਸਤਰ ਗੰਤਾ ਕੋ ਕਰਮ ਪ੍ਰਨਾਸੀ ਬਸੈ ਨੇ ਸੰਸੋ ਪਾਤਰੰ ਉਦਾਸੀ ਤਜੋ ਕਾਮ ਕ੍ਰੋਧੰ ਸਬੈ ਲੋਭ ਮੋਹੰ ਮਹਾ ਜੋਗ ਮਹਾ ਮੋਨੀ ਸੋਹੰ ਕਰੈ ਪ੍ਰਕਾਰੀ ਮਹਾ ਬ੍ਰਹਮਚਰਜੰ ਸਵ ਧਰਮਾਧਿਕਾਰੀ ਮਹਾ ਤਤਵੇਤਾ ਸੁ ਸੰਿਆਸ ਜੋਗੰ ਅਨਾਸੰ ਉਦਾਸੀ ਸੋ अनासा महा उर्द रेता सन्यासी महा तत् बेता अनास उदासी सबय योग साधय रह एक चित्तं तजाय और सर्वंगय हो एक हितं तरए ताप धूम करै फान उचंग चुलै माध अग्नंग तौ ध्यान मुचंग महा ब्रह्मचर जंग महा धर्म तारि के रुद्र करण योग न्यास तजे राज चके सर्व जके सर्व लोकंग जके जग गंधर्व चके देवता चंद सूरंग सुरांग शके जीव जंत्रम लखे परम रूपंग तजो गर्भ सर्बंग लगे पान भूपंग जटी दंड मुंडी ब्रह्मचारी जति जंगमी जामनी जंत्र धारी परी पार्वती परम देसी पछेले बलि बालखी बंग रूपी ਜਟੀ ਜਾਮਨੀ ਜੰਤਰ ਧਾਰੀ ਛਲਾਰੇ ਅਜੀ ਆਮਰੀ ਨਿਵਲ ਕਾ ਕਰਮ ਵਾਰੇ ਅਤੇ ਵਾਗਨ ਤਰੀ ਜੋ ਆ ਜਗਿਆ ਧਾਰੀ ਅਧੰਗੂਰ ਧਰੇਤੇ ਬਰੰਗ ਬ੍ਰਹਮਚਾਰੀ ਜਿਤੇ ਦੇਸ ਦੇ ਸੰਘੂ ਤੇ ਛਤਰ ਧਾਰੀ ਸਵੈ ਪਾਨ ਲਾਗਾ ਤਜੋ ਗਰਭ ਭਾਰੀ ਕਰੈ ਲਾਗ ਸਰਬੰਸੋ ਸੰਨਿਆਸ ਜੋਗੰ ਇਹੀ ਭੰਤ ਲਾਗੇ ਸੁਭੰ ਸਰਬ ਸਬਾਹ ਦੇਸ ਦੇਸਾਨ ਤੇ ਲੋਗ ਆਏ ਕਰੰਗ ਦਤ ਕੇ ਹੰਗ ਮੂੰਡੰਗ ਮੁੰਡਾ ਏ ਕਰੇ ਸੀਸ ਪੈ ਪਰਮ ਜੂ ਜਟਾਨੰ ਕਰੈ ਲਾਗ ਸੰਨਿਆਸ ਜੋਗ ਪਰਮਾਨੰ ਗੁਰ왈 ਛੰਦ ਦੇਸ ਦੇਸਨ ਕੇ ਸਬਾਹ ਨਿਰਵਾਰ ਕਹਤੇ ਠੌਰ ਜਾਨ ਪਾਨ ਪਰੈ ਸਬੈ ਗੁਰ ਦਤ ਸ੍ਰੀ ਸਰਮੌਰ ਤਿਆਗ ਔਰ ਨੈ ਨੈ ਮਤ ਏਕ ਹੀ ਮਤ ਠਾਨ ਆਨ ਮੂਨ ਮੁੰਡਾ ਤੇ ਸਬ ਰਾਜ ਪਾਟ ਨਿਧਾਨ ਆਨ ਆਨ ਲਗੇ ਸਵੈ ਪਗ ਜਾਨ ਕਹ ਗੁਰਦੇਵ ਸ਼ਸਤਰ ਸਾਸਤਰ ਸਵੈ ਪ੍ਰਤੰਬਰ ਅਨੰਤ ਰੂਪ ਆ ਭੇਵ ਗਾਤ ਅਛਿਦ ਰੂਪ ਅਭੇਦ ਜੋਗ ਦੁਰੰਤ ਅਮਿਤ ਉਜਲ ਅਜਿਤ ਪਰਮ ਉਪਜੋ ਸੋਤਤ ਮਹੰਤ ਪੇਖ ਰੂਪ ਚਕੇ ਚਰਾਚਰ ਵਿਮਾਨ ਜਤਰ ਤਤਰ ਰਹਿ ਨਿਰਾਦ ਵਿਚਿਤ ਸਮਾਨ ਅਤਰ ਛਤਰ ਨਿਰਪਤ ਕੋ ਤਜ ਜੋਗ ਲੈ ਆਨ ਆਨ ਕਰੈ ਲਗੈ ਜਥਰ ਤਤਰ ਉਦਾਸ ਇੰਦਰ ਉਪਿੰਦਰ ਚਕੇ ਸਬੈ ਚਤ ਚੌਕਿਓ ਸਸੀ ਭਾਨ ਲੈ ਨਾ ਦਦ ਛਿਨਾਏ ਆਜ ਨਿਰਪਤ ਮੋਹਰ ਮਹਾਨ ਰੀਜ ਰੀਜ ਰਹੇ ਜਹਾਂ ਤਾ ਸਰਬ ਵਿਉ ਜਾਣ ਜਾਣ ਸਬੈ ਪਰੇ ਗੁਰਦੇਵ ਦਤ ਮਹਾਨੰ ਜਤਰ ਤਤਰ ਵਿਸਾ ਵਿਸਾਲੇ ਪ੍ਰਾਜ ਸਾਜ ਵਿਸਾਰ ਆਨ ਆਨ ਸਭ ਹੋ ਗਏ ਪਗ ਦਤ ਦੇ ਉਦਾਰ ਜਾਣ ਜਾਨ ਸੋ ਧਰਮ ਕੋ ਮਾਨ ਕਹਿ ਗੁਰਦੇਵ ਪ੍ਰੀਤ ਮਾਨ ਸਭੈ ਲਗੈ ਮਨ ਛਾੜ ਕੈ ਅਹਮੇਵ ਰਾਜ ਸਾਜ ਸਭੈ ਤਜੇ ਨਿਰਪੀਸ ਕੈ ਸੰਿਆਸ ਆਣ ਜੋ ਕਰੈ ਲਗੈ ਹੋਵੇ ਜੱਤਰ ਤਤਰ ਉਦਾਸਿ ਮਾਡੇ ਅੰਗ ਬਿਬੂਤ ਉਜਲ ਸੀਸ ਜੂੜ ਜਟਾਨ पांत पांतन सौ सो वे सबराज पाठनिधान जतर ततर विसार संपद पुत्र मित्र कलत्र भेसलेस नियास को निविछाड़ कह जय पत्र बाजराज समाज सुंदर छाड़ कह गजराज आन आन बसे महावन जतर ततर उदास पादरी छंद तो प्रसाद ए पावन सर्व छित के निरपाल सन्यास योग लागे उताल ਇਕ ਕਰਤ ਅਲਗ ਨਿਵਲਿਆਦ ਕਰਮ ਇਕ ਤਰਤ ਧਿਆਨ ਲੈ ਵਸਤਰ ਚਰਮ ਇਕ ਤਰਤ ਵਸਤਰ ਬਲ ਕਲਨ ਅੰਗ ਇਕਰ ਹਾਤ ਕਲ ਪੇਸਥਿਤ ਉਤੰਗ ਇਕ ਕਰਤ ਅਲਪ ਦੂਦਾ ਆਹਾਰ ਇਕ ਰਾਤ ਵਰਖ ਬਹੁ ਨਿਰਾਹਾਰ ਇਕ ਰਾਤ ਮੋਨ ਮੋਨੀ ਮਹਾਨ ਇਕ ਕਰਤ ਨਿਆਸ ਤਜ ਖਾਣ ਪਾਣ ਇਕ ਰਾਤ ਇਕ ਪਗ ਨਿਰਾਧਾਰ ਇਕ ਵਸਤ ਗ੍ਰਾਮ ਕਾਨਨ ਪਹਾਰ ਇਕ ਕਰਤ ਕਸ਼ਕਰ ਤੁਮਰਬਾਨ ਇਕ ਕਰਤ ਭਾਤ ਭਾਂਤੰ ਸਿਨਾਣ ਇਕ ਰਹਾਤ ਇੱਕ ਪਗ ਜੋਗ ਪ੍ਰਮਾਨ ਕਈ ਊਰਧਵਾ ਮਨ ਮਨ ਮਹਾਨ ਏਕ ਰਹਾਤ ਬੈਠ ਜਲ ਮਦ ਜਾਏ ਇਕ ਤਪ ਤਿਆਗ ਊਰਜ ਜਰਾਏ ਇਕ ਕਰਤ ਨਿਆਸ ਬਹੁ ਵਿਧ ਪ੍ਰਕਾਰ ਜਿਕ ਰਹਾਤ ਇਹ ਕਿ ਆ ਸਾਧਾਰ ਕਈ ਕਬ ਨਹੀਂ ਕਰਤ ਦੀਠ ਕਈ ਤਪ ਪਰ ਜਾਰ ਪੀਠ ਕਈ ਬੈਠ ਕਰਤ ਬ੍ਰਤ ਚਰਜ ਕਈ ਧਰਤ ਚਿਤ ਇੱਕ ਨਿਧਾਨ ਕਈ ਕਰਤ ਜਾਗੇ ਅਰ ਹੋਮਦਾਨ ਕਈ ਪਾਂਤ ਪਾਂਤ ਬਿਦਵਤ ਸ্নান ਕਈ ਧਰਤ ਜਾਇ ਲੈ ਪਿਸ਼ਟ ਪਹਾਣਾ ਕਈ ਦੇਤ ਕਰਮ ਕੀ ਛਾਰਬਾਨ ਕਈ ਕਰਤ ਬੈਠ ਪਰਮ ਪ੍ਰਕਾਸ਼ ਕਈ ਪ੍ਰਮਤ ਪੱਬ ਮਨ ਮਨ ਉਦਾਸ ਕੇ ਰਹਤੇ ਇਕਿਆਸ ਨੇ ਅਡੋਲ ਕਈ ਜਪਤ ਬੈਠ ਮੁਖ ਮੰਤਰਯਾ ਮੂਲ ਕਈ ਕਰਤ ਬੈਠ ਹਰਿਆਉਚਾਰ ਕਈ ਕਰਤ ਪਾਠ ਮਨ ਮਨ ਉਦਾਰ ਕਈ ਭਗਤ ਭਾਗ ਭਗਵਤ ਭਜੰਤ ਕੇ ਰਿਚਾਵੇ ਸਿਮਰਤ ਰਟੰਤ ये एक पान अस्तित्व ढोल के जप्त जा मन चित खोल के रहत एक मन निराहार एक पछत पौन ਮਨ मन उदार एक करत न्यास हाथ सा विहीन एक रहत भगवत अधीन एक करत नायक मन फल आहार एक रट नाम श्याम अपार एक एक आस हाथ सा बरत एक बहुत पा दुख दे साथ एक कहत हेक हरकोक थवान एक मुक्त पत्र पावत निदान ਏਕ ਪਰੇ ਸਰਨ ਹਰ ਕੇ ਦੁਆਰੇ ਇਕ ਹਰਿ ਤਾਸ ਨਾਮ ਆਧਾਰ ਇਕ ਜਪਤ ਨਾਮ ਤਾਕੋ ਦੁਰੰਤ ਇਕ ਅੰਤ ਮੁਕਤ ਪਾਵਤ ਬੇਅੰਤ ਕਰਤ ਨਾਮ ਇਸ ਦਿਨ ਉਚਾਰ ਜੇ ਕਗਨ ਹੋਤਰ ਬ੍ਰਹਮਾ ਵਿਚਾਰ ਇਕ ਸ਼ਾਸਤਰ ਸਰਬ ਸਿਮਰਤ ਰਟੰਤ ਸਾਧ ਰੀਤ ਇਸ ਦਿਨ ਚਲੰਤ ਇਕ ਹੋਮਦਾਨ ਯਰ ਬੇਦ ਰੀਤ ਇਕ ਰਟਤ ਬੈਠ ਖਟ ਸ਼ਾਸਤਰ ਮੀਤ ਇਕ ਕਰਤ ਬੇਚਾਰੋ ਵਿਚਾਰ ਗਿਆਨ ਗਾਤਮਾ ਮਾਇਆ ਪਾਰ ਇਕ ਪਾਂਥ ਪਾਂਥ ਮੇ ਸਤਾਨ ਪਹੁੰਚੇ ਬਹੁਦੀਨ ਬੋਲ ਪਛਦੇ ਤਰੋਜ ਕਈ ਕਰਤ ਬੈਠ ਬਹੁ ਪਾਂਥ ਪਾਠ ਕਈ ਅਨਤਿਆਲ ਚਾਹ ਮੰਤ ਕਾਠ ਕਈ ਪਾਂਥ ਪਾਂਸੋਂ ਤਰਤ ਧਿਆਨ ਕਈ ਕਰਤ ਬੈਠ ਹਰ ਕਿਰਤ ਕਾਨ ਕਈ ਸੁਣਤ ਪਾਠ ਪਰ ਨਹੀਂ ਮੂਰਤ ਕਲਪ ਬਹੁ ਬੀਤ ਕਈ ਬੈਠ ਕਰਤ ਜਲ ਆਹਾਰ ਕਈ ਪ੍ਰਮਦ ਦੇਹ ਦੇਸਨ ਪਹਾਰ ਕਈ ਜਗਤ ਮਦ ਕੰਦਰੀ ਦੀਹ ਕਈ ਬ੍ਰਹਮਚਰਜ ਸਰਤਾ ਮਝੀ ਕੀ ਰਾਹ ਤੇ ਬਾਤ ਮਦ ਨੀਰ ਜਾਏ ਕੀ ਅਗਰ ਜਾਰ ਤਾਪਤ ਬਨਾਏ ਕੀ ਰਾਹ ਸਿਧ ਮੁਖ ਮੁਹਣੀ ਅਨਿਆਸ ਚਿਤ ਇਕ ਆਖਮਾਨ ਅਨਡੋਲ ਗਾਤ ਅਵਕਾਰ ਮਹਿਮਾ ਮਹਾਨ ਆਪਹਾ ਭੰਗ ਅਨ ਪੈ ਸਰੂਪ ਅਨ ਪ੍ਰਕਾਸ਼ ਅਭਿਅਕਤ ਤੇ ਇੰਦਸ ਦਿਨ ਉਦਾਸ ਇਹ ਪਾਤ ਜੋ ਕੀਨੇ ਅਪਾਰ ਗੁਰਬਾਜ ਜੋ ਨਾ ਹੋਵੇ ਉਧਾਰ ਤਾ ਪਰੇ ਦਤ ਕੇ ਚਰਨਿਆਂਨ ਕਹਿ ਦੇਹ ਜੋਗ ਕੇ ਗੁਰ ਜਲ ਮਦਿ ਜਾਉਨ ਮੁੰਡੇ ਅਪਾਰ ਬਨ ਨਾਮ ਤਾਉਨ ਹੋਵੈ ਕੁਮਾਰ ਗਿਰ ਮਦ ਸਿਖ ਕਿੰਨੇ ਅਨੇਕ ਗਿਰ ਭੇ ਸਹਿਤ ਸਮਝੋ ਵਿਵੇਕ 파ਰਥ ਪਨੰਤ ਦੇ ਭੇ ਦਰੰਤ 파ਰਤੀ ਨਾਮ ਤਾਕੇ ਪਣੰਤ ਪੁਰ ਜਾਸ ਸਿਖ ਕਿੰਨੇ ਅਪਾਰ ਪੂਰੀ ਨਾਮ ਤਾਉਨ ਜਾਣੂ ਵਿਚਾਰ ਪਰਬਤ ਬਿਖੈ ਸਜੇ ਸਿਖ ਗੀਨ ਪਰਬਤ ਸੁਨਾਮ ਲੈ ਤਾਹੇ ਦੀਨ ਇਹ ਪਾਂਤ ਉਚਰਕਰ ਪੰਚਨਾਮ ਤਦ ਦਤ ਦੇਵ ਕਿੰਨੇ ਵਿਸਰਾਮ ਸਾਗਰ ਮੰਜਾਰ ਦੇ ਸਿਖ ਕੀਨ ਸਾਗਰ ਸੋ ਨਾਮ ਤਿਨ ਕੇ ਪਰਬੀਨ ਸਾਰਸਤ ਤੀਰ ਦੇ ਕੀਨ ਤੇਲ ਸਾਰੁਸਤੀ ਨਾਮ ਤਿਨ ਨਾਮ ਮੇਲ ਤੀਰਥਨ ਵੀ जे सिਖ ਕੀਨ ਤੀਰਥ ਸੋ ਨਾਮ ਤਿਨ ਕੋ ਜਿਨ ਚਰਨ ਦਤ ਕੇ ਗਹਿਆਨ ਤੇ ਭੈ ਸਰਬ ਵਿਦਿਆ ਨਿਧਾਨ 임 ਕਰਤ ਸੇਖ ਜਾਤਾ ਵਿਹਾਰ ਆਸਰਮਨ ਵੀ ਜੋ ਜੋ ਨਿਹਾਰ ਤਹਤਾ ਹੀ ਸਿੱਖ ਜੋਕੀਨ ਜਾਏ ਆਸ਼ਰਮ ਸੋ ਨਾਮ ਤਿਨ ਕੋ ਸੁਹਾਏ ਆਰਨ ਬੀਜਿ ਅਪਹਿ ਦਤ ਸੰਿਆਸ ਰਾਜਪਤ ਬਿਮਾਲ ਮਾਤੇ ਤਹਤਾ ਸੋ ਕੀਨ ਜੇ ਸਿੱਖ ਜਾਏ ਹਰਿਨ ਨਾਮ ਤਿਨ ਕੋ ਰਖਾਏ ਇਤਿ ਸ੍ਰੀ ਬਚਿਤ੍ਰਨਾਟਕ ਗ੍ਰੰਥੇ ਦਤ ਮਹਾਤਮੇ ਅਨਪਾਉ ਪ੍ਰਕਾਸ਼ੇ ਦਾਸ ਨਾਮ ਧਿਆਏ ਸੰਪੂਰਨ